ਹਾਂ ਸ਼ਲੋਕ ਹਾਂ ਸੰਤ ਸੰਤ ਸਰਨ ਜੋ ਜਨ ਪਰੇ ਸੋ ਜਦ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਆਉਦਾ ਸਤ ਸਰਨ ਜੋ ਜਨ ਪਰੇ ਸੁਰ ਜੋ ਜਨ ਉਧਰਨ ਹਾ ਸਤ ਨੇ ਸਮਝਣੇ ਜਨ ਪਹਿ ਜਾਣ ਲੋ ਜਿਵੇਂ ਜਾਣ ਉਹ ਧਾਰ ਉਹਨਾਂ ਦਾ ਉਧਰਨ ਤੇ ਕਾਬਲ ਹੁੰਦੇ ਜੀ ਉਹਨਾਂ ਦਾ ਆਧਾਰ ਹੋ ਜਾਣਾ ਚਾਹੀਦਾ ਪਰ ਦੁਨੀਆਂ ਦੇ ਸਾਰੇ ਲੋਕਾਂ 'ਚੋਂ ਤਕਰੀਬਨ 60% ਸੰਸਤਾ ਦੇ ਚੇਲੇ ਨੇ ਆਧਾਰ ਕਿਸੇ ਦਾ ਨਹੀਂ ਹੋਇਆ ਇਹ ਕੀ ਗੱਲ ਸਵਾਲ ਆ ਸੰਸਤਾ ਜਰੂਰ ਜੇ ਉਹ ਜਨਪੜ ਹੈ ਦੇ ਕਾਬਿਲ ਨੇ ਉਧਰ ਨਾਲ ਹੈ ਉਧਰ ਜਾਣਾ ਚਾਹੀਦਾ ਨਾ ਫਿਰ ਆਧਾਰ ਕਿਉਂ ਨਹੀਂ ਹੋ ਰਿਹਾ ਸਾਂਤ ਜਵਾਬ ਦੇ ਇਹਦਾ ਜਵਾਬ ਸਾਂਤ ਦੇਣ ਉਹਦਾਂ ਹਾਂ ਜਵਾਬ ਨਹੀਂ ਦੇ ਸਕਦੇ ਤੁਸੀਂ ਗੱਡੀ 'ਚ ਬਹਿ ਗਏ ਉਹਨਾਂ ਕੋਲ ਤੇਲ ਹੈ ਨਹੀਂ ਸੀ ਉਹ ਰਾਤ ਤੇਲ ਮੁੱਕ ਗਿਆ ਉਹਨਾਂ ਦਾ ਫਿਰ ਕਿਸੇ ਤੋਂ ਲੈ ਲੂ ਕੇ ਪਾ ਕੇ ਚਲਾ ਘਾਟਿਆ ਫਟ ਗਿਆ ਤੋਂ ਨਾਲ ਜਦ ਬਿਠਾ ਲਿਆ ਤੁਸੀਂ ਜਿਉਂ ਨੂੰ ਜਾਣ ਜੋਗੀ ਗੱਡੀ ਹੋਣੀ ਸੀ ਉਹਨਾਂ ਦੀ ਜੋਕੜਾ ਜੋ ਲੋਕਾਂ ਨੂੰ ਰਵਾਉ ਕਰਦੇ ਨੇ ਉਹਾਂ ਦੀ ਗੱਟੀ ਦਾ ਕਿਤਾ ਗਈਓ ਜੇ ਤੂੰ ਜਵਾ ਉੱਠੇ ਜਾ ਰਹੇ ਜੋ ਉਲਟਾ ਬਦੇਦੇ ਰਹਿਣੇ ਸਭ ਕਬੀਰ ਇਹਨਾਂ ਨੂੰ ਖੁਦ ਗਿਆਨ ਹੈ ਨਹੀਂ ਉਹਦਾ ਇਹਨਾਂ ਦਾ ਖੁਦ ਸੰਤਾ ਦਾ ਨਹੀਂ ਹੋਇਆ ਦੂਜੇ ਦਾ ਸਮਝ ਰੱਖਦੇ ਇਹ ਗੱਲ ਕਹਿ ਕੇ ਉਹਨਾਂ ਇੱਕ ਹਉ ਤੋ ਸੰਸਰੀ ਫੈਲਾ ਦਿੱਤੀ ਜੀ ਸਲੋਖ ਇਹ ਸ਼ਲੋਖ ਲੈ ਕੇ ਸੰਸਰੀ ਫੈਲਾ ਦਿੱਤੀ ਕਿ ਜੋ ਜਨ ਸਤ ਦੀ ਸ਼ਰਨ ਪੈ ਕੇ ਸੰਤ ਸਨ ਜੋ ਜਨ ਪੜੇ ਸੋ ਦਾ ਸਾਰਾ ਫਿਰਦੌਸਨ ਭਰਿਆ ਪਿਆ ਕੀ ਹਿਦਵਾ ਦੇ ਕੀ ਸਿਖਾਂਗੇ ਕੀ ਅਸਾਈਆਂ ਦੇ ਕੀ ਮੁਸਲਮਾਨਾਂ ਦੇ ਉਹ ਦਰਮਨ ਸੰਤ ਉਹ ਵੀ ਸਾਈਂ ਕਹਿ ਦਿੰਦੇ ਨੇ ਉਹ ਵੀ ਸੰਤ ਨੇ ਸ਼ਬਦਾਂ ਦੇ ਵਰ ਅ ਲੋਕ ਵੀ ਉਹ ਸੰਤਾਂ ਦੇ ਚੇਲੇ ਨੇ ਮੰਤਰੇ ਸੰਤਾਂ ਨੂੰ ਫਿਰ ਉਹਦਾ ਆਰ ਕਉ ਨਹੀਂ ਹੋ ਰਿਹਾ ਸੇ ਜਨ ਉਧਨ ਹਾਰ ਉਹਨਾਂ ਤੇ ਕਾਬਲ ਨੇ ਜੇ ਨਹੀਂ ਉਧਾਰ ਹੋ ਰਿਹਾ ਤਾਂ ਗੱਲ ਇਹ ਸੱਤੇ ਕੋਈ ਹੈ ਨਹੀਂ ਉਦੋਂ ਖਾਲਦੀ ਪਰ ਸੰਤ ਦੀ ਬੰਦਾ ਨਾਨਕਾ ਬਹੁਤ ਬਹੁਤ ਜੇ ਮੈਂ ਸੰਤ ਦੀ ਦੱਧਿਆ ਕੀਤੀ ਹੋਵੇ ਪਰ ਬਾਹਰ ਜਾਣੂ ਪੜੇ ਬਹੁਤ ਬਹੁਤ ਜੇ ਗੱਲ ਝੂਠ ਹੋਵੇ ਇਹ ਪੜਨ ਵਾਲੇ ਨੂੰ ਬਾਹਰ ਬਾਹਰ ਜਾਣਾ ਪੈਣਾ ਚਾਹੀਦਾ ਜੇ ਸੰਤ ਦੀ ਦੱਧਿਆ ਹੋਵੇ ਇਸ ਗੱਲ ਇਹ ਗੱਲ ਕੀਤੀ ਹੈ ਇਹਦੇ ਵਿੱਚ ਹਾਂ ਇਹ ਗੱਲ ਜਿਹੜਾ ਨਹੀਂ ਕੀਤਾ ਨਹੀਂ ਜੇ ਸੰਤ ਸਾਨੂੰ ਜੋ ਪਰੇ ਜਨ ਪਰੇ ਜੇ ਕੋਈ ਕਹਿ ਦਿੰਦਾ ਜੇ ਕੋਈ ਉਹਦਾ ਕਹਿੰਦਾ ਮੈਨੂੰ ਬਹੁਤ ਬਾਰੋਂ ਤਰਲੇ ਤੁਸੀਂ ਕਹਿੰਦਾ ਸੱਤੇ ਦਦਿਆ ਬਹੁਤ ਬਾਰੋਂ ਅਵਤਾਰ ਹੋਣਾ ਚਾਹੀਦਾ ਕਿਹਾ ਬਿਲਕੁਲ ਕਿਹਾ ਪਰ ਉਹ ਸੰਤ ਕੌਣ ਹੁੰਦਾ ਹੈ ਉਹਦੀ ਹੋਗੀ ਗਾਹ ਅਸ਼ਬਦੀ ਲਗੇਗੀ ਅਸ਼ਬਦੀ ਪੂਰੀ ਸੰਤ ਕਹਿੰਦੇ ਕਿ ਇਹ ਤਾਂ ਠੀਕ ਹੈ ਜੇ ਸੱਤ ਦੇ ਦਦਿਆ ਉਹ ਬਹੁਤ ਅਵਤਾਰ ਹੈ ਹੁਣ ਇਹ ਵੀ ਸੁਣ ਲੋ ਸੰਤ ਹੁੰਦਾ ਕੌਣ ਹੈ ਕਿਤੇ ਇਹ ਨਾ ਸਾਥ ਜੇ ਤੁਸੀਂ ਸੰਤਾਂ ਦੀ ਵਿਝਾ ਬਨਾਲ ਸਕੇ ਡਾਗੋ ਪਹਿਲੀ ਗੱਲ ਇਹ ਜੇ ਸੰਤ ਦੇ ਜਿਹੜੇ ਚੇਲੇ ਨੇ ਸੇਵਕ ਨੇ ਸੰਤ ਦੇ ਸੁਣ ਪਏ ਹੋਏ ਨੇ ਜੇ ਉਹਨਾਂ ਦਾ ਆਧਾਰ ਨਹੀਂ ਹੋਇਆ ਸੰਤਾਂ ਸ਼ੱਕ ਉੱਥੇ ਹੀ ਲੱਗ ਜਾ। ਪਹਿਲੀ ਤਾਂ ਤੁਸੀਂ ਸ਼ਤਰੀ ਇਹੀ ਹੈ ਉਹਨਾਂ ਦੇ ਜਿਹੜੇ ਸੇਵਕ ਉਹਨਾਂ ਦਾ ਉਧਾਰ ਕਿਉਂ ਨਹੀਂ ਹੋ ਰਿਹਾ ਸੰਤ ਦੀ ਗੱਲ ਛੱਡੋ ਸੱਚ ਦੀ ਸੂਈ ਸੰਤ ਦੇ ਚਲੇ ਵੀ ਸੱਚ ਦੇ ਡੁਪਲੀਕੇਟ ਹੈ ਪਹਿਲੀ ਸੂਈ ਸੱਚ ਦੀ ਉੱਥੇ ਹੈ ਸੰਤ ਦੇ ਡੁਪਲੀਕੇਟਾਂ ਦੇ ਚੇਲਿਆਂ ਤੇ ਕੋਈ ਸੂਈ ਨਹੀਂ ਆਸੀ ਸੂਈ ਸੂਈ ਜਿਹੜਾ ਬੋਲ ਰਿਹਾ ਉਹਨੇ ਆਪਣੇ ਚਲੇ ਦੀ ਜਿਹੜਾ ਲਿਖ ਰਿਹਾ ਇਸ ਲੋਕ ਉਹ ਚੈਲੰਜ ਕਰ ਰਿਹਾ ਉਹਨੇ ਆਪਣਾ ਤੇ ਸੂਈ ਲੈ ਲਈ ਕਿ ਦੂਏ ਪਾਸੇ ਸੱਤ ਕੀ ਦਿੱਤਾ ਨਾਨਕਾ ਬਹੁਤ ਬਹੁਤ ਉਪਤਾਰ ਮੈਂ ਕਹਿ ਰਿਹਾ ਵੀ ਸੰਤ ਦੀ ਰੁੱਦਾ ਕਰਨ ਵਾਲੇ ਨੂੰ ਬਹੁਤ ਬਹੁਤ ਉਪਤਾਰ ਵੀ ਮਿਲਣਾ ਚਾਹੀਦਾ ਕੋਈ ਇਹ ਨਾ ਗੱਲ ਮੈਂ ਸੰਤਾਂ ਦਿਖਲਾਉਂ ਸੰਤ ਹੈ ਨਹੀਂ ਅਸਲ ਦੇ ਜੇ ਸੰਤ ਕੋਈ ਹੁੰਦਾ ਮੈਂ ਨਹੀਂ ਕਹਿ ਸਕਦਾ ਦੀ ਇਹ ਗੱਲ ਕਿਉਂਕਿ ਬਹੁਤ ਬਹੁਤ ਉਪਤਾਰ ਹੈ ਸੰਤ ਦੀ ਦਦਾਲੇ ਖਤਨਾਲ ਉਤਾਰ ਹੈ ਆਪੇ ਲਈ ਦੇ ਨੀ ਮੈਂ ਕਹਿ ਸਕਦਾ ਉਹ ਕੋ ਬਾਰ ਬਾਰ ਉੱਤਾਰ ਬੜ ਗਿਆ ਨਾਲ ਸੰਤਿਹਤਤਾ ਜੇ ਨੰਤਾ ਹੈ ਗੱਲ ਤਾਂ ਮੇਰੇ ਤੇ ਵੀ ਤਾਂ ਅਰ ਲੱਗਦੀ ਹੈ ਹੋਰ ਬਾਰ ਉਹ ਤਾਂ ਸੀ ਕੋਈ ਸੈਨ ਤਾਂ ਜੁਰੂਰ ਕੀਤਾ 7 ਸਾਲ ਜੇ ਜਨਪਰੇ ਉਹ ਨਾਨਕ संत ਮਲੇ ਸੱਚ ਬੋਲਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਛੋੜੋ ਕਹਿੰਦੇ ਸਾਡੇ ਹੱਕ ਚ ਹੈ ਜੀ ਸੰਤ ਲੋਕੀ ਜੇ ਪਤਾ ਲੱਗੂਗਾ ਵੀ ਤੁਹਾਡੇ ਹੱਕ ਚ ਹੈ ਇਹ ਅਸ਼ਪਦੀ ਤੋਂ ਦੂਰ ਬਨਾਰਸ ਕੇ ਠੱਗ ਸਾਬਤ ਕਰਦੀ ਹੈ ਕਾ ਤੁ ਨੂੰ ਸੰਤ ਸਾਬਤ ਕਰਦੀ ਇਹ ਉਹ ਕਹਾ ਦੇਖਦੇ